ਮਨਮੂਰ ਕੋ ਕਾਹੇ ਬਿਨ ਲਾਈਆ ਪੂਰਤ ਲਿਖੇ ਤਾਂ ਲਿਖਿਆ ਪਾਈਆ ਮਨਮੂਰ ਕਾਹੇ ਗੱਲ ਲਾਈਆ ਕਿਹਾ ਮਨਮੂਰ ਖਈ ਮੂਰਗਾ ਉਹ ਦੇਖ ਮੈਂ ਚੱਕੇ ਲਾਉਂਦਾ ਹੈ ਫਰੇਗ ਦਾ ਮੂਰ ਅਖਰ ਗੱਲ ਕਰਦਾ ਉਹ ਕਹਨਾ ਤਾਂ ਆਪਾਂ ਦੇ ਕੰਨ ਗੋਸਾ ਕਰੂਗਾ ਸਾਚਾ ਗਾ ਰੋਣਾ ਗੋਸਾ ਕਰੂਗਾ ਉਹ ਮੂਰਖ ਮੈਂ ਜਿਹੜੀ ਗੱਲ ਕਰਦਾ ਮੂਰਖਾ ਉਹ ਤੇ ਜੀ ਸੱਚ ਬੋਲਦਾ ਉਹ ਕਹਨਾ ਆਪਾਂ ਜੇ ਸੱਚ ਬੋਲਦਾ ਰਾਜ ਉਹ ਜਿਹੜਾ ਆਪਾਂ ਜਿਹੋ ਰਾਜ ਚੱਲਣਾ ਇਹ ਮੂਰਖਾ ਜੜਾ ਇਹ ਕਰਦਾ ਮੂਰਖ ਵੀ ਉਹ ਦੇਖ ਟਿੱਕੇ ਲਾਉਂਦਾ ਮਾਣੂ ਮੂਰੇ ਕਾਹ ਸਾਬ ਬਿੱਲ ਆਇਆ ਨੂੰ ਬਿਲੇ ਨਹੀਂ ਤਾਂ ਲਿਖਿਆ ਪਈਏ ਵਾਣ ਮੂਰੇ ਕਾਹ ਹੈ ਬਿੱਲ ਆਇਆ ਕਹਿੰਦਾ ਮੈਂ ਤੁਰਿਆ ਸੀ ਉਹ ਪ੍ਰਾਪਤ ਹੋ ਗਿਆ ਤੈਨੂੰ ਹੁਣ ਦੇ ਚੀਕਾ ਕਾਤੇ ਮਾਰਦਾ ਡਾਕੇ ਮਾਰੇ ਤੇ ਤਾਂ ਝੇੜ ਤੇ ਬੈਠੇ ਹਾਂ ਝੇੜ ਖਾਂਦਾ ਬਿਜਲੀ ਹੈ ਨਹੀਂ ਪੱਖਾ ਹੈ ਨਹੀਂ ਜੇ ਇੱਕਾ ਕਾ ਦੇ ਮਾਰਦਾ ਹੈ ਅੱਜ ਨਾ ਫਰਦਾ ਨੇ ਸ਼ਹਿਰ ਪਰ ਤੇ ਪਾ ਦੇਈ ਸੀ ਤਵਾਕੇ ਖਾਂ ਦੇਈ ਸੀ ਜੇ ਨੂੰ ਵੀ ਨਹੀਂ ਆਇਆ ਕਬਰ ਜੇ ਕਰਿਆ ਤਾਂ ਭਾਰ ਵੀ ਭਾਰਨ ਵਾਲੇ ਨਾ ਚੀਕਾ ਮਾਰ ਹੁਣ ਆ ਨਾ ਕਰੀਂ ਜਾਣ ਨਾ ਕਰੀਂ ਵੋਤਾਨੂ ਵੀ ਕਹੀਂ ਵਿਗਿਆਨ ਪਾਈਏ ਕਮਨਾ ਕਰਿਓ 13 ਕਾਇ ਮਿਲਾਈਆ ਪੁਰਬ ਲਿਖੇ ਕਾ ਜੇ ਭਾਈਆ ਤੋ ਕਿਤਾ ਜੋਗਾ ਕੀਆ ਜੋਗਣ ਪਾਇਆ ਦੋਸਰ ਨੀਤੀਆ ਬੰਦ ਲਖ ਜੇ ਦੂਖ ਸੁਖ ਪ੍ਰਭ ਦੇਵਨ ਪ੍ਰਭ ਤੇਰਾ ਦੇਖੋ ਤੇਰਾ ਜਿਹੜਾ ਆਪਣਾ ਨਾ ਪ੍ਰਭ ਅੱਦਰ ਕੋਈ ਤੋ ਸੁੱਖ ਦਿੰਦਾ ਜੀ ਉਹ ਜਿਹੜਾ ਨਿਆਣਾ ਨਾ ਛੋਟਾ ਜਿਹਾ ਬੱਚਾ ਜੇ ਬਿਮਾਰ ਹੋ ਜਾਏ ਜੇ ਉਹਨੂੰ ਕੌੜੀ ਦਵਾਈਆਂ ਕਰਦੇ ਹੀ ਰਹਿਣਗੇ ਨਿਆਣਾ ਜੰਨਾ ਹੀ ਹੋ ਜਾਵੇ ਦਵਾਈ ਨਹੀਂ ਲੈਣੀ ਕੌੜੀ ਉਹ ਸਾਨੂੰ ਪਤਾ ਨਾ ਵੀ ਇਹਨੇ ਠੀਕ ਨਹੀਂ ਹੋਣਾ ਦਵਾਈ ਵੈਨ ਉਹ ਨਿਆਣੇ ਦੀ ਮੰਨੀ ਹੈ ਕੋਈ ਬਿਮਾਰੀ ਨੂੰ ਠੀਕ ਕਰੀਏ ਉਹਦਾ ਬਹੁਦਾ ਸਵਾਲ ਹੈ ਉਹਦਾ ਬੁਢਾ ਸੋਹਦਾ ਮੈਨੂੰ ਵੀ ਠੀਕ ਹੋਲੀ ਦਵਾਈ ਦਾ ਸਾਡਾ ਉਹਦੀ ਬਿਮਾਰੀ ਨਹੀਂ ਮਤਲਬ ਹੈ ਉਹਦੀ ਸਵਾਲ ਹੈ ਸਾਡੀ ਸਿਹਤ ਨਾਲ ਉਹ ਕਹਿੰਦਾ ਤੂੰ ਬਿਮਾਰੀ ਨਾ ਮੈਨੂੰ ਕੋੜੀ ਦਵਾਈ ਪਲਾਉਂਦੇ ਨੇ ਕੋੜੀ ਦਵਾਈ ਪੀਣੀ ਆਪੂ ਉਹ ਦੁਖਦਾਰੂ ਆ ਸੁਖ ਰੋਗ ਹੈ ਤੂੰ ਸੁਖ ਮੰਗੇ ਰੋਗ ਵੀ ਹੋ ਗਿਆ ਹੁਣ ਤੈਨੂੰ ਦਵਾਈ ਦੇ ਰਹੇ ਹਾਂ ਦੁਖਦਾਰੂ ਦੇ ਦੇ ਰਹੇ ਹਾਂ ਕਿਤੇ ਕਿਤੇ ਉਹ ਕਹਿੰਦਾ ਜਾਲ ਪਿੱਛੇ ਦੋ ਜਾਣੇ ਜੀ ਦੀ ਦੇ ਵੀ ਬਾਦੇ ਮੋਜ ਪਿੱਛੋਂ ਇਹੋ ਖਰਾਬ ਹੋ ਗਿਆ ਪਿੱਛੋਂ ਪਾ ਦਿਓ ਪਰ ਇੱਕ ਖਾਣੀ ਪਊਗੀ ਕੋਈ ਪੌਣੀ ਸੁਖ ਪ੍ਰਭ ਪਹਿਲਾਂ ਦੁਖ ਦਿੰਦਾ ਕੌੜੀ ਦਵਾਈ ਦਿੰਦਾ ਪਿੱਛੇ ਦੋ ਜਾਣੇ ਜੀ ਦੇ ਵੀ ਬਾਦਦਾ ਕੋਈ ਮਿੱਠੀ ਜੀ ਵੀ ਬਾਦਦਾ ਮੋਜ ਦੁੱਖ ਦੇ ਨਾਲ ਸੁੱਖ ਤਾਂ ਦਿੰਦਾ ਉਹ ਚਲੋ ਵੀ ਤੂੰ ਤੇ ਰੱਬਾ ਹੈ ਨਾ ਕਿ ਦੁੱਖ ਹੀ ਦੁੱਖ ਲਈ ਜਾਂਦਾ ਸੁੱਖ ਦਈਂ ਇਹ ਨਰਾਇਣ ਕੋਦੋਂ ਖੋ ਗਿਆ ਆਦਮੀ ਜ਼ਿੰਦਗੀ ਤੋਂ ਨਾ ਕਰਦੇ ਸੁੱਖ ਤਾਂ ਹੁੰਦਾ ਵੀ ਲਾਲਚ ਨਾਲ ਜਿਉਣਾ ਵੀ ਰਹਿੰਦਾ ਇਹ ਠੀਕ ਵੀ ਹੋ ਜਵੇ ਜੇ ਤੇ ਉਹ ਹੀ ਨਾ ਗੱਲ ਕਰੇ ਮੈਂ ਕਹੇ ਵੀ ਪੈਸਾ ਦੂਜੀ ਠੀਕਾਈ ਲਾ ਦੋ ਛੱਡੋ ਪਰੇ ਮੈਨੂੰ ਲਾਇ ਲੋ ਜਰਣਾ ਇਹ ਦੁੱਖ ਮਿੱਤੇ ਨਹੀਂ ਲਗਾਤਾ ਚੱਲ ਹੁੰਦਾ ਉਹ ਵਿੱਚ ਦੀ ਦੁੱਖ ਦੇ ਵਿੱਚ ਸੁੱਖ ਦੇ ਦੁੱਖ ਦੇ ਤੇ ਸੁੱਖ ਆਇਆ ਅਸਲ ਚਾ ਦੁੱਖੇ ਲੈਣ ਆਇਆ ਸੁੱਖ ਲੈਣ ਆਇਆ ਨਹੀਂ ਨੋ ਦੁੱਖ ਆਇਆ ਹੈ ਜੀ ਦੁੱਖ ਸਾਡਾ ਰ ਨੋ ਦੁੱਖ ਸਾਡਾ ਰ ਉਹ ਸੁੱਖ ਸਾਡਾ ਸੁੱਖ ਸਾਡਾ ਰ ਜੋ ਦੁੱਖ ਸਾਡਾ ਰ ਨਿਕੱਢਿਆ ਕਿਉਂ ਇਹਦਾ ਮਾਰ ਪੈਣੀ ਹੋਈ ਪੈਣੀ ਹੈ ਕੜੀਏ ਕੜੀਏ ਕੜੀਏ ਕਿਆ ਕੜੂ ਵੀ ਸਿਆ ਆਦਤ ਘੜਦਾ ਚੋਟ ਮਾਰਦਾ ਹੀ ਹੈ ਘੜਿਆ ਜਾਣਾ ਮਤ ਕੜੀ ਜਾਂਦੀ ਹੈ ਤਾਂ ਵੀ ਮਾਰ ਪੈਣੀ ਹੈ ਪਰ ਉਹਦੇ ਨਾਲ ਹਰ ਇੱਕ ਚੋਟ ਨਾਲ ਕੋਈ ਕਿਵਟ ਵੀ ਬਣਦੀ ਹੈ ਰੂਪ ਜੋੜ ਦਾ ਜੋੜ ਦਾ ਪਤਾ ਫਾਇਦੇ ਦਾ ਨਹੀਂ ਉਹ ਗਿਆਨੀ ਧੂਖ ਸੁਖ ਪ੍ਰਭ ਜੀ ਦੇਵਨ ਹਾਰ ਅਵਰ ਪਿਆਰ ਤੁਸੇ ਜਿ ਤਾਰ ਜੋ ਅਵਰ ਪਿਆਰ ਤੋਂ ਤੁਸੀਂ ਜਿ ਤਾਰ ਦੇਵਨ ਹਾਰ ਅਵਰ ਪਿਆਰ ਤੋਂ ਤੁਸੀਂ ਜਿ ਤਾਰ ਉਹ ਵੀ ਜਰੂਰ ਆਉਣਾ ਇਹ ਆਹੋ ਜਿਹੜੇ ਸੁਖ ਦੇਣੇ ਵਾਲੇ ਨੇ ਜਿਹੜੇ ਮਨੋਗਾਂ ਪੂਰੀਆਂ ਕਰਣ ਵਾਲੇ ਨੇ ਛੱਡਦੇ ਉਹਨਾਂ ਨੂੰ ਤੇ ਸਿਚਾਰ ਉਹਦਾ ਕਿਤਾ ਸਰ ਜਿਹੜੇ ਦੂਰ ਦੂਰ ਦੋਏ ਨੂੰ ਉਹ ਡਾਕਟਰ ਦੇਖ ਜਿਹੜਾ ਆਪਰੇਸ਼ਨ ਵੀ ਕਰਦਾ ਉਹ ਦੁੱਖ ਵੀ ਦਿੰਦਾ ਨਾਲ ਹੋੜੀ ਵੀ ਦਿੰਦਾ ਵੀ ਭਾਈ ਇਹਨੂੰ ਪੀੜਾ ਬਣਾਉਗੇ ਨਾਲ ਟੀਕਾ ਲਾਉਂਦਾ ਵੀ ਸੁਖ ਤਕਲੀਫ ਇਹਨੂੰ ਘੱਟ ਮਹਿਸੂਸ ਹੋਵੇ ਉਹ ਵੀ ਦਿੰਦਾ ਜੋਨਿਕ ਵੀ ਲੈਂਦਾ ਖੂਰ ਵੀ ਪੌਂਦਾ ਗਲੂਕੋਜ਼ ਵੀ ਲਾਉਂਦਾ ਬਚਾਉਂਦਾ ਉਹ ਬਚਾਉਂਦਾ 20 ਹਰ ਇੰਨੇ ਤਰੀਕੇ ਬਚਾਉਣ ਦੇ ਕਰਦਾ ਨਾ ਦੁਆ ਕੀ ਕਰਦਾ ਦੁਆ ਖੂ ਤੱਕਦਾ ਤੋਖਦਾ ਤੂੰ ਆਪਣੇ ਪੈਸੇ ਮੈਨੂੰ ਦੇ ਦੇ ਆ ਮਾਲ ਖੂ ਦੇ ਚਾਲ ਤੂੰ ਸਿੱਧਾ ਸੁੱਖ ਤੇ ਜਾਏ ਯਾਹ ਸਾਜੀ ਖੂ ਬਣਾਇਆ ਸਾਜੀ ਸਾਰਾ ਕੁਦਾਨ ਕਰੇ ਜਮਾ ਥੜ ਥੱਲੇ ਆਰਾ ਲੱਗਿਆ ਤਾਂ ਆਰਾ ਚਲਾਣ ਚਲਾ ਦਿੰਦੇ ਸੀ ਉਹ ਹੱਥ ਨਾਲ ਚਲਦਾ ਸੀ ਉਹ ਜਸੁੱਤੇ ਦਿੱਤਾ ਨੇ ਆਲੀ ਚੱਲਦੀ ਉਹ ਵੜਿਆ ਜਾਣਾ ਉਹ ਥੱਲੇ ਉੱਤੇ ਭੰਗਾ ਜਵਾਗਰ ਖਾਲ ਕੇ ਕਰਦੇ ਸੁਰਖ ਬੜਾਈ ਸੀ ਉਹਦੀ ਉਹਦਾ ਅੰਗਰੇਜ਼ਾਂ ਨੇ ਮੁਸਲਮਾਨਾਂ ਨੇ ਮੰਦ ਕਰਾਈਆ ਮੁਸਲਮਾਨਾਂ ਨੇ ਮੰਦ ਕਰਾਈਆ ਮੁਸਲਮਾਨ ਰਾਜ ਲਾਉਂਦਾ ਸੁਰਖ ਨਹੀਂ ਸੀ ਬੰਦ ਹੁੰਦੀ ਆ ਗੋਸਾ ਉੱਤੇ ਕਾਜੀ ਸੀ ਇਹ ਸੋ ਪਰਮਾਤਮਾ ਗਾਇਆ ਆਹੋ ਇਹ ਸੋ ਪਰਮਾਤਮਾ ਗਾਇਆ ਮੇਰੇ ਉਹ ਹਿੰਦਸਾ ਉਹਨਾ ਦਾ ਇਰਸਾ ਦਾ ਚਾਰਦਾਬੀ ਮਰਦਾ ਤੋਂ ਫਿਰ ਉਹ ਤਾਂ ਕਦਮ ਤੇ ਸੀ ਉਹ ਕਹਿੰਦੇ ਦੁਖਦਾਰੂਈ ਹੈ ਹਾਂ ਜੋ ਕਛ ਕਰੇ ਛੋਰੀ ਸੁਖ ਮਾਨ ਊਲਾ ਕਾਇਫ ਰਹੇ ਜੋ ਕੁਛ ਹੋਏ ਜੋ ਕੁਛ ਹੋ ਰਿਹਾ ਹੈ ਜੋ ਕੁਛ ਕਰਾ ਹੈ ਜੋ ਕੁਛ ਕਰ ਰਿਹਾ ਉਹੀ ਹੋ ਰਿਹਾ ਜੋ ਕੁਛ ਕਰਦਾ ਹੈ ਡਾਕਟਰ ਚਾਹੇ ਕੀ ਗੱਲ ਹੈ ਚਾਹੇ ਕੌਲੀ ਦਵਾਈ ਦਿੰਦਾ ਹੈ ਕੋਈ ਸੁਖਮਾਨ ਚਾਹੇ ਉਹ ਤਾਂ ਕੋਈ ਲੀਫਰੀ ਦਵਾਈ ਦਿੰਦਾ ਉਹ ਨੂੰ ਕਰਦੇ ਮੈਂ ਤੇਰੇ ਫੈਦੇ ਉਹ ਬਿਮਾਰੀ ਕਿਉਂ ਬੰਦ ਨਹੀਂ ਲੋੜ ਹੈ ਉਹਨੂੰ ਪਤਾ ਦਾਕਤ ਇਹਦਾ ਸਮਝਿਆ ਤੇ ਆਪਣੀਆ ਗੱਲਾਂ ਵਿੱਚ ਦੋਲਾ ਜੋ ਕੁਛ ਕਰਾ ਸੋਈ ਸੁਖਮਾਨ ਉਹਨੂੰ ਕਰਕੇ ਮਨੋ ਕਰਕੇ ਤੁਹਾਨੂੰ ਸੁਖ ਸਾਧਨ ਤਾਂ ਜਾਣਾ ਆ ਜੋ ਕੁਛ ਡਾਕਟਰ ਕਹਿੰਦਾ ਉਹ ਕਹੇ ਵੀ ਜੋ ਵਰਤੀ ਕਰੀ ਜਾ ਮੈਨੂੰ ਤੰਦਰੁਸਤੀ ਹੋ ਜਾਈ ਕਹਿੰਦੇ ਨੇ ਤੰਦਰੁਸਤੀ ਹਜ਼ਾਰ ਦੇ ਹੈ ਹਜ਼ਾਰਾਂ ਨੇ ਹੁੰਦਾ ਨੇ ਬਰਾਬਰ ਰਹਿਤਾ ਸਿਰ ਤੋਂ ਸੋਣਾ ਨਹੀਂ ਮਾਰ ਭੂਲਾ ਕਾਇਰ ਡਾਕਟਰ ਦੀ ਉਹ ਮਰਜੀ ਹੈ ਡਾਕਟਰ ਜੋ ਕਰਦਾ ਠੀਕ ਕਰ ਇਹ ਗੱਲ ਅਲੱਗ ਹੈ ਵੀ ਅੱਜ ਦੇ ਡਾਕਟਰ ਹੁਰਦੇ ਗੱਦ ਲੈ ਲੈਂਦੇ ਕੋਈ ਉਹ ਡਾਕਟਰ ਥੋੜੀ ਨੇ ڈاکٹر نہیں ایسے کہہ سکتے یہ سفاری ہے وہ پرمیشن ایسا ڈاکٹر تھوڑی ہے پر ایتھے سارے ਕੇ ہے نہیں کوئی گلہ ہوا ہے یار اوے ہوے طالب گرو بھی تے ہے جی نے وہ ڈاکٹروں کا کوئی گلہ ਅਰਧਾਸ ਲੱਖ ਦਾ ਕਰਜ਼ਾ ਬਿਕ ਜਾਂਦਾ ਉਹ ਕਹਿੰਦੇ ਜਾਂਦੇ ਨੇ ਮਜ਼ਦੂਰ ਨੇ ਕੀ ਕਰਨਾ ਅਸੀਂ ਭਾਈ ਫ੍ਰੀ ਕਰਦੇ ਆਂ ਫਲਾਨਾ ਕੰਮ ਜੇ ਨਹੀਂ ਕਰਨਾ ਪਰਮੇਸ਼ਰ ਤੇ ਤਾਂ ਕਰਨਾ ਹੀ ਨਹੀਂ ਸਾਰੀ ਤੇਰੇ ਸਾੜਿਆਂ ਖਰਾਬ ਹੋ ਜੂਗੀ ਤੇਰੇ ਇਹ ਲੋਕ ਤੁਹਾਨੂੰ ਇਹ ਹੋਰ ਲੋਭੀ ਪਸੰਦ ਤੂੰ ਇਹ ਦੱਸ ਵੀ ਜਿਹੜੀ ਸੰਸਾਰ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਤੂੰ ਨਾਲ ਲੈ ਗਿਆ ਜਦ ਤੂੰ ਪੈਦਾ ਹੋਇਆ ਗਰਭ ਚ ਆਇਆ ਤੇਰੇ ਕੋ ਤਾਂ ਸਰੀਰ ਬਣੀ ਸੀ ਸਰੀਰ ਵੀ ਇੱਥੇ ਆ ਕੇ ਹੀ ਲਿਆਇਆ ਸਰੀਰ ਵੀ ਇੱਥੇ ਆ ਕੇ ਹੀ ਲਿਆਇਆ ਤਾਂ ਸਰੀਰ ਨਾਲ ਲੈ ਗਿਆ ਸੀ ਤਾਂ ਹੀ ਇੱਥੇ ਗਾਲਤ ਨੇ ਲੱਭੀ ਤੇ ਅੱਜ ਤੱਕ ਬੈਠੀ ਹੂੰ ਕੌਣ ਵਸਾਈ ਤੇਰੇ ਸੰਗ ਦੱਸ ਕੀ ਆਇਆ ਤੇਰੇ ਸੰਗ ਫੁਰਦੋ ਇਹਨਾਂ ਬਾਸਾ ਵਿੱਚ ਫੜ ਗਿਆ ਦੇਖ ਕੇ ਰਸ ਲੈ ਉਹ ਰਸ ਜਿਵੇਂ ਪਤੰਗਾ ਰਾਸ ਦੇ ਵਿੱਚ ਲਵੜ ਜਾਂਦਾ ਹੈ ਕੋਈ ਫੁੱਲ ਵਿੱਚ ਬਹਿ ਜਾਂਦਾ ਫੁੱਲ ਖਾ ਗੱਲ ਆ ਮਾਇਆ ਫੁੱਲ ਹੈ ਜਿਹੜਾ ਇਹ ਰਾਸ ਦੇ ਵਿੱਚ ਲਵੜ ਗਿਆ ਇਹ ਖਾ ਜਾਂਦੀ ਆ ਜੋ ਇਸ ਦੀ ਸੇਵਾ ਕਰੇ ਤਸੀਰ ਉਹ ਖਾਏ ਇਹਦਾ ਹੋ ਜਾਂਦੀ ਆ ਜਿਹੜਾ ਇਸ ਨਾਲ ਲਵੜਦਾ ਹਾਂਜੀ ਸ਼੍ਰੀ ਰਾਮ ਨਾਮ ਜਪ ਹਿਰਦੇ ਮਾਹਿ ਨਾਲ ਪਦ ਪਤ ਵਿਤੀ ਕਰ ਜਾ ਉਹ ਰਾਮ ਨਾਮ ਜਪ ਹਿਰਦੇ ਮਾਹਿ ਉਹ ਰਾਮ ਨਾਮ ਜਪਲਾ ਹਿਰਦੇ ਚਾਤੇ ਰਹਿ ਜਾ ਉੱਥੇ ਜਪਣਾ ਬਾਹਰ ਨਾ ਲੈ ਗਿਆ ਉਹ ਜਿੱਥੇ ਹੈਗਾ ਉੱਥੇ ਜਪਲਾ ਉੱਥੇ ਜਾਣਾ ਬਾਹਰ ਆਉਂਦਾ ਹੀ ਨਹੀਂ ਹੁੰਦਾ ਐ ਨਹੀਂ ਆਉਂਦਾ ਬਾਹਰ ਰਾਮ ਨਾਮ ਬਾਹਰ ਕੇ ਮੈਦੂ ਬਾਰਾ ਤਾਂ ਹੋ ਰਾਮ ਨਾਮ ਤਾਂ ਕੁ ਰਾਮ ਨਾਮ ਤਾਂ ਆਵਾਜ਼ ਹੈ ਉਹ ਕਹਨ ਉਹ ਸੰਦਾਰੀ ਅੱਖਾਂ ਨੂੰ ਦੇਦਾ ਦੀ ਜੀ ਉਹਦਾ ਕਹਿ ਸੀ ਜੇ ਸਾਡੇ ਬਾਹਰ ਜੇ ਆ ਵੀ ਜਾ ਉਹਦਾ ਘੜਾ ਪਤਾ ਲੱਗਣਾ ਰਾਮ ਨਾਮ ਦਾ ਹੁਕਮ ਹੈ ਰਾਮ ਦਾ ਹੁਕਮ ਰਾਮ ਦਾ ਨਾਮ ਔਰ ਆਮ ਜਿਹੜਾ ਸਭਾ ਕਟ ਰਾਮ ਬੋਲਦਾ ਉਹੀ ਤਾਂ ਰਾਮ ਨਾਮ ਹੈ ਉਹਦਾ ਬੋਰੇ ਰਾਮ ਨਾਮ ਰਾਮ ਦਾ ਜਦ ਹਿਰਦੇ ਮਾਹੈਂ ਆਸ ਕਰ ਆਤਮਾ ਦੀ ਆਵਾਜ਼ ਨੂੰ ਸਮਝੋ ਜਿਹੜੀ ਤੇਰੇ ਅੰਦਰ ਹੈ ਆ ਗਾ ਨੂੰ ਪਾਸ ਸੈਕੀ ਕਰ ਜਾਏ ਨਾਨਕ ਪਰਸੇ ਸਿੱਕਾ ਜਾਏ ਤੂੰ ਵੀ ਆਪਣੇ ਇੱਜ਼ਤ ਬਚਾ ਕੇ ਨਾ ਇਥੋਂ ਜੰਗ ਤੋਂ ਜਿਹੜਾ ਕੰਮ ਕਰਨਾ ਕਾਮਯਾਬ ਹੋ ਕੇ ਜਾਏਗਾ ਜਨਵਤ ਕੀ ਕੋਈ ਜਿਹੜਾ ਬੱਚਾ ਗਿਆ ਦਾਨ ਤੇ ਜੇ ਤਾਂ ਪਾਸ ਹੋ ਗਿਆ ਕਿੰਨੇ ਤੋਂ ਬਰਾਤੇ ਵਧੀਆ ਇੱਜ਼ਤ ਹੈ ਜੇ ਨਾ ਹੋਇਆ ਪਾਸ ਕਰ ਜਾਣ ਨੂੰ ਜੀ ਨਹੀਂ ਕਰਦਾ ਤਾਂ ਹੀ ਦਾ ਜਵਾਬ ਆ ਤਾਂ ਬੰਦਾ ਅੱਗ ਲੱਗਣੇ ਪੀ ਜੀ ਦਾ ਮਾਰਿਆ ਕਰ ਜਾਣ ਨੂੰ ਜੀ ਨਹੀਂ ਕਰਦਾ